ਪਿਰੋਕ ਮਹੱਲਾ चौथा ਤੁਰ ਮਾਰੇ ਪੂਰੇ ਸਤਗੁਰੂ ਸੋਈ ਹੁਣ ਸਤਗੁਰ ਮਾਰੇ ਜੇ ਮਿਲਣ ਨੂੰ ਬਹੁਤ ਈਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਤੁਰ بے محدود لکھایا پرب دے انڈے وچ بند کر دتے سی انہاں دے اندر مہتا پیدا ہو گئی تھی درگاہ دے وچ بے محدود لکھایا قسمیں کت تر جائے وہ لمیٹڈ لمیٹڈ کر کے پرب دے انڈے وچ بند کر ایڈی ہوئی اوقات ہے تھوڑی سربیاپی نہیں ہو سکدے تسی کلے جڑ کے تھربیاپی شبت دے نال جڑ کے ہی اوویں ਆਰੇ ਏਰੀਆ ਤੁਹਾਡਾ ਇਸੇ ਚੋਂ ਦਾ ਇੰਦੇਰੀਏ ਚ ਰਹੋ ਪਰਬ ਦੇ ਅੰਦਰ ਵਿੱਚ ਬੰਦ ਕਰਤੇਾਰੇ ਪੂਰੇ ਸਤਗੁਰੂ ਪੂਰੇ ਪਰਮੇਸ਼ਰ ਦੇ ਦੁਆਰੇ ਜੇ ਉਸੇ ਹੀ ਮਾਰੇ ਮਾਰ ਪੈਂਦੀ ਹੈ ਕੀ ਦੀ ਜਿਹੜੀ ਵੱਟ ਹੈ ਉਹ ਪੱਦੀ ਜਾਂਦੀ ਹੈ ਪਹਿਲਾਂ ਹੋ ਗਏ ਸੀ ਪੰਦਕੇ ਦੁਆਰਾ ਸਾਡੀ ਉਹਨਾਂ ਤੋਂ ਮਾਰ ਪੈ ਰਹੀ ਹੈ ਗੁਰਬਾਨੀ ਦੀ ਇਹ ਜਿਹੜਾ ਪਹਿਲਾ ਪਰਮੇਸ਼ਰ ਦੀ ਬਾਹਰ ਪਈ ਹੈ ਜਿਹੜੇ ਤੇ ਜਿਹੜੇ ਪਰਮੇਸ਼ਰ ਤੋਂ ਦਰਗਾਹ ਜੋ ਬਾਗੀ ਹੋਏ ਨੇ ਨਾ ਬਾਗੀ ਹੋ ਬੀਜ ਰੂਪ ਹੋ ਗਏ ਠੀਕ ਹੈ ਉਹਨਾਂ ਤੇ ਹੀ ਬਾਹਰ ਪੈ ਰਹੀ ਹੈ ਉਹਨਾਂ ਤੇ ਹੀ ਦੇ ਖਿਲਾਫ ਬੋਲਦੀ ਹੈ ਤੁਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਦਾ ਸਾਜ਼ ਦੋਲਦੇ ਕੀ ਕਰਨਾ ਜਿਹੜਾ ਕੁਝ ਕਰਨਾ ਹੋ ਵੀ ਚਾਹ ਉਹ ਹੀ ਜੱਤ ਗੁਰੂ ਨੂੰ ਮਾਰ ਮਾਰਦਾ ਜੇ ਮਿਲਣ ਨੂ ਬਹੁਤ ਤੇਰਾ ਲੋਚੀ ਐ ਮਾਂ ਦੇ ਹੀ ਮਿਲਣ ਕਰਤਾ ਰਹੀ ਮਿਲਣ ਬਥੇਰਾ ਲੋਚਦੇ ਨੇ ਆਪਣੇ ਆਪਣੇ ਮਰਜ਼ਾ ਅਨੁਸਾਰ ਕੋਈ ਸਬੰਧੀ ਲਾਉਂਦੇ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਪਰ ਮੱਤਾ ਪੜੀ ਕਰਤਾਰ ਦੇ ਮੈਨਾਂ ਲਊਗਾ ਕਰਤਾਰ ਦੀ ਮੱਤ ਲੈ ਦੇ ਦੀ ਕਰਤੇ ਪਰਖ ਉਡੀਕੈ ਨੇ ਤੂੰ ਬੁਲਾ ਦੇਖੇ ਨੀ ਕਰਦੇ ਉਤੋਂ ਦੀ ਪੁੱਛਦੇ ਕਿ ਮਿਲਣੀ ਹੈ ਆਪਣੇ ਆਪ ਮਿਲਣ ਦੀ ਕੋਸ਼ਿਸ਼ ਕਰਦੇ ਆਪਨੀ ਆਪਣੀ ਮਤ ਬਣਾਈ ਕਹਿੰਦੇ ਗੁਰੂ ਬਣੇ ਫਿਰਦੇ ਨੇ ਉਪਦੇਸ਼ ਵੀ ਕਰਦੇ ਨੇ ਤੇ ਕਰਤਾਰ ਦੇਵੇ ਮਿਲਣ ਦੇ ਕਰਤਾਰ ਨਾਲ ਸੰਤ ਨਹੀਂ ਆਉਂ ਉਹ ਸਾਂਝ ਤੋਂ ਉਹ ਮਿਲਣ ਲੈ ਲੋ ਠੀਕ ਹੈ ਮਿਲ ਕੇ ਹਾਂਜੀ ਸਤ ਸੰਗਤੀ ਢੋਈ ਨਾ ਲਹਿਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਇ ਮਿਲੇ ਹੁਣ ਉਹਨਾਂ ਨੂੰ ਇਸ ਮਾਰੇ ਜਮ ਜੰਦਾਰੇ ਛੱਤ ਜੰਦਰ ਦੇ ਮਤਾਂ ਹੁਵੇੜੀ ਕਿ ਆਉਂਦੇ ਨੇ ਤਾਂ ਢੋਈ ਦੀ ਮਿਲਦੀ ਉਹਨਾਂ ਦੇ ਮਤਲਬ ਦੀ ਗੱਲ ਨਹੀਂ ਢੋਈ ਦਾ ਮਤਲਬ ਉਹਨਾਂ ਦੇ ਮਤਲਬ ਦੀ ਗੱਲ ਸਭ ਦੀ ਹੈ। ਉਹ ਚਾਹੁੰਦੇ ਨੇ ਇੱਥੇ ਉਹ ਗੱਲ ਹੈ ਸੰਗਤ ਦੇ ਵਿੱਚ ਇਸ ਕਰਕੇ ਉਹ ਉੱਥੇ ਟਿਕਦੇ ਨੇ ਜੇ ਤਾਂ ਉਹਨਾਂ ਦੀ ਫਿਰ ਛਾਪੜੀ ਆਵੇ ਹਾਂ ਤੁਸੀਂ ਬੈਠੀ ਹੋ ਠੀਕ ਹੋ ਬੈਠੋ ਤੁਹਾਡੀ ਗੱਲ ਸੁਣੀਏ ਤੁਹਾਡੇ ਵਾਲਿਓ ਜਿਹੜਾ ਧੋਈ ਮਿਲ ਤਾਂ ਉਹਨਾਂ ਤੇ ਵਿਰੁੱਧ ਆ ਉਹਨਾਂ ਦੀ ਵਿਚਾਰਤਾ ਤੇ ਤਾਂ ਧੋਈ ਨਹੀਂ ਮਿਲਦੀ ਦੇ ਪੈੰਦੀ ਹੋਵੇ ਬਾਹਰ ਪੈੰਦੀ ਹੈ ਦੇ ਖਿਲਾਫ ਪ੍ਰਚਾਰ ਹੈ ਸੱਤ ਸੰਗਤ ਵਿੱਚ ਇਹ ਨਾ ਮਲੇ ਉੱਥੇ ਨਹੀਂ ਉਹਨਾਂ ਨੂੰ ਧੋਈ ਮਿਲਦੀ ਗੁਰੂ ਸੰਗਤ ਗੁਰੂ ਵਿਚਾਰੇ। ਚੁਬੇ ਸੰਗਤ ਦੇ ਵਿੱਚ ਤਾਂ ਗੁਰੂ ਵਿਚਾਰ ਚੱਲਦੀ ਹੈ। ਸਤੁਰ ਦੀ ਵਿਚਾਰ ਤਾਂ ਰਹਿ ਚੱਲਦੀ ਹੈ। ਆਪਣੀ ਮਰਜ਼ੀ ਦਾ ਵਿਚਾਰ ਹੈ ਉਹਨਾਂ ਕੋ। ਉੱਥੇ ਉਹਨਾਂ ਦਾ ਮਰਜ਼ੀ ਦੀ ਵਿਚਾਰ ਉਤਾਰ ਹੈ ਦੇ ਵਿੱਚ ਗੁਰੂ ਵਿਚਾਰ ਤਾਂ ਰਹਿ ਹੈ। ਗੁਰੂ ਦੇ ਵਿਚਾਰ ਤਾਂ ਰਹਿ ਹੈ। ਪਰਮੇਸ਼ਰ ਦੇ ਵਿਚਾਰ ਤਾਂ ਰਹਿ ਹੈ। ਪ੍ਰਵਿਚਰ ਦੇ ਭਾਣੇ ਚ ਰਜਾ ਕੇ ਰਹਿਣ ਦੀ ਗੱਲ ਚੱਲਦੀ ਹੈ। ਹੂੰ। ਤੇ ਕੇ ਜੀ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਚਲਿਆ ਜਾਵੇ ਉਹਨਾਂ ਦੇ ਪਾਸੇ ਚਲਿਆ ਜਾਵੇ ਉਹਨਾਂ ਦੇ ਧੜੇ ਜਵੇ ਜਾ ਕੇ। ਸਸੰਗਤ ਦੇ ਖਿਲਾਫ ਵਾਲਿਆਂ ਦੇ ਉਹ ਜਬ ਭਾਰਤ ਜਬਨ ਵਰਸ ਤੇ ਤੇ ਪਰੇ ਜਮ ਜੰਦਾਰੇ ਇਹ ਦੋ ਧਲੇ ਹੋ ਗਏ ਇੱਕ ਗੁਰਮਤ ਤੋਂ ਖਿਲਾਫ ਧਲੇ ਇੱਕ ਗੁਰਮਤ ਵਾਲਾ ਪਰਮੇਸ਼ਰ ਦਾ ਧਲੇ ਸੱਚ ਦਾ ਧਲੇ ਇੱਕ ਝੂਠ ਦਾ ਧਲੇ ਜਿਹੜਾ ਝੂਠ ਦੇ ਧਲੇ ਜਾਂਦਾ ਉਹ ਜੰਪੋਸਦਾ ਜਮ ਜੰਦਾਰ ਭਾਰਤ ਠੀਕ ਹੈ ਜੀ ਇੱਧਰ ਗੁਰੂ ਮਾਰਦਾ ਮਾਰਦੇ ਹੋਈ ਪਸੀਦੇ ਇੱਧਰ ਤਾਂ ਗੁਰੂ ਮਾਰਦਾ ਗੁਰੂ ਤਾਂ ਮਾਰਦਾ ਘੱਟ ਵਾਸਤੇ ਦੇ ਮਤ ਨੂੰ ਘੱਟਣ ਵਾਸਤੇ ਪਹਿਲੀ ਤੂੰ ਤੋੜ ਕੇ ਨਾਲ ਜੋ ਗਲਤ ਹੈ ਤੋੜ ਕੇ ਨੂ ਮਾਰ ਲੱਗਦੀ ਪਰ ਉਧਰ ਜੱਗਦੰਵਲ ਚੋਂ ਹੁੰਦਾ ਉਹ ਜੀ ਸੋਚਿਆ ਜੀ ਗੁਰਬਾਬਾ ਫਿਟਕੇ ਤੇ ਫਿੱਟੇ ਗੁਰ ਅੰਗਦ ਕੀਤੇ ਕੂੜੀ ਆਰੇ ਪਹਿਲਾਂ ਗੁਰ ਬਾਬੇ ਨੇ ਫਿੱਟ ਕੇ ਗੁਰ ਫਿੱਟੇ ਉਹ ਓ ਦੀ ਫਟੇ ਦੀ ਕੋਲੀ ਹੋਵੇ ਕੋਲ ਤੈ ਗਿਆ ਠੀਕ ਹੈ ਜੀ ਅਗਿਆਨਤਾ ਹੋਵੇ ਗਿਆਨਤਾ ਹੋਰ ਛਾ ਗਈ ਜੇ ਤੁਹਾਨੂੰ ਫਿੱਟੇ ਜਾਂਦਾ ਨਾ ਹਾਂਜੀ ਕੋਈ ਵਧੀ ਨਹੀਂ ਬਣਦਾ ਸਰੇ ਦਾ ਕੁਝ ਬਣਦਾ ਅਗਿਆਨਤਾ ਛਾ ਫਿਰ ਫਿੱਟੇ ਉਹ ਅੰਮ੍ਰਿਤ ਜਿੱਤੇ ਕੋੜਿਆਲੇ ਕੋੜੰਦ ਕੋਲ ਆਏ ਤੇ ਗੁਰੰਧ ਨਸਮਾਇਆ ਅਨੇਜੇ ਗੁਰਬਾਨ ਕਹਿੰਦੇ ਤਾਂ ਬਸ ਸੁਣੀਓ ਦੀ ਕਿਸੇ ਦੀਤਾ ਬਸ ਗੱਲੇ ਹੀ ਬਹੁਤ ਸੀ ਉਹ ਤਾਂ ਵੇੜੇ ਦੀ ਦੀ ਖਣ ਸਦੇ ਉਹ ਐ ਜਿਹਾ ਅੱਲਾ ਫਰਦ ਸੀ ਤੇ ਗੁਰਬਾਨ ਕਹਿੰਦਾ ਗੁਰਬਾਨ ਕਹੋੜਿਆਰੇ ਜਿੱਤੇ ਵੀ ਗੁਰਬਾਨ ਬੱਚੇ ਛੱਡ ਕੇ ਘਰ ਜੋ ਵੀ ਉਹ ਨਰਸ ਦਾ ਕਿਦਾ ਫਲਾ ਦਿਓ ਸਰਦਾਰਿਆ ਤੁਹਾਡੇ ਕੋਲ ਲੋਕਾਂ ਕੋ ਦਰੂ ਸਮਝਉਦਾ ਜਾਣਦੇ ਕੋਲ ਲੈ ਹਾਜੀ ਬਤੋ ਕੁਖੀ ਰੱਖੀ ਹੋਈ ਸੀ। ਠੋੜਾ ਸਮਝੋ ਜਾਈ ਜੀ ਤਾਂ ਕੋਲ ਲੱਗੀ ਕੌੜੀ ਜੱਗੀ ਕਹੀ ਬੁਰੀ ਵਿਰੁੱਧ, ਨਾਨਕ ਦੀ ਬਦਲੋਬੀ ਖਾਮ ਖਾਦੀ ਲੋਕ ਕਰਦੇ ਰਹੇ ਜਿਹੜੇ ਫਿਰਦਾ। ਉਹਨੇ ਸਭ ਕੁਝ ਛੱਲਿਆ ਤੁਹਾਡੇ ਵਾਸਤੇ। ਉਹ ਦੱਸੋ ਜੀ ਉਹਨਾਂ ਕੋਈ ਪ੍ਰੋਪਰਟੀ ਬਣਾਈ ਸੀ, ਕੋਈ ਲਾਲਚ ਸੀ? ਤੁਸੀਂ ਲਾਭ ਨਹੀਂ ਲੈ ਸਕਦੇ ਠੀਕ ਸੀ ਤੁਸੀਂ ਤਾਂ ਠੀਕ ਸੀਗੇ ਉਹ ਘਰ ਬੈਠਿਆ ਨੂੰ ਤੁਹਾਨੂੰ ਧਿਆਨ ਦੇ ਰਿਹਾ ਜਾ ਕੇ ਤੁਸੀਂ ਲੈਦੀ ਰਹੇ ਕਸੂਰ ਇਹਦਾ ਨਹੀਂ ਪੜਦਾ ਸਟੂਡੈਂਟ ਉਹ ਥੱਪੜ ਖਾਂਦਾ ਹੀ ਹੁੰਦਾ ਉਹ ਘੂਰ ਉਹਨੇ ਪੈਦੀ ਹੋਦੀ ਆ ਹਾਂਜੀ ਤਾਂ ਕਿਨੇ ਸਿੱਖ ਬਣਾਏ ਤੇ ਕੀ ਨਹੀਂ ਨਾਲੇ ਤਾਂ ਗੁਰੂ ਨਾਨਕ ਨਾਲ ਵੀ ਗੁਰ ਲੱਗਿਆ ਤੇ ਅੰਗਦ ਸਾਹਿਬ ਨਾਲ ਵੀ ਗੁਰ ਲੱਗਿਆ ਹਾਂਜੀ ਹੋਰ ਇਹ ਲੱਗਣੇ ਠੀਕ ਹੈ ਜੀ ਠੀਕ ਹੈ ਪਰ ਅਸੀਂ ਆਪਣੀ ਜਿਹੜੀ ਆਮ ਪਾਸ਼ਾ ਵਿੱਚ ਗੁਰੂ ਕਹਿੰਦੇ ਆ ਗੁਰਬਾਣੀ ਅਨੁਸਾਰ ਗੁਰੂ ਲੱਗਦੇ ਦੇ ਚੜਾਇਆ ਉਹ ਛੁੱਟਦਾ ਨਹੀਂ। ਇੱਕ ਵਾਰ ਗੁਰੂ ਮੂਹੇ ਵਿੱਚ ਪਾਸਾ ਕਿਹਾ ਸੀਗਾ। ਹਾਂ ਜਿਹੜੇ ਸੀ ਇਹ ਉਹ ਸੀ ਦੁਆਵਾਂ ਦੇ ਬੱਚੇ ਸੀ। ਇੱਤ ਜਿਹੜੀ ਵਿਚਾਰੀ ਬਾਜ ਵਾਲੀ ਮੱੜਲੀ ਬਾਹਰ ਗਈ ਖਾਲੀ ਪਰ ਕਿਆ ਹੁੰਦਾ ਵੀ ਸੀ ਉਹ ਦੋਈ ਜਿਹੜੀ ਉਹ ਜਣੀ ਉਹ ਲੱਗਦੀ ਸੀ ਜਿਵੇਂ ਲੱਗਦੀਆਂ ਹੁੰਦੀਆਂ ਨੇ ਉਹਨਾਂ ਦੋਈ ਜਣੀ ਦੇ ਬੱਚੇ ਦੇ ਮੂੰਹ ਦੇ ਵਿੱਚ ਥੋੜਾ ਜਿਹਾ ਪਖੜਾ ਲਿਆ ਕੇ ਨਾ ਮੂੰਹ ਦੇ ਵਿੱਚ ਪਾਤਾ ਤੁਸ਼ਲੀ ਕੀਤੀ ਉਸ ਪਖੜੇ ਨੂੰ ਬਰੀ ਕੱਢਾ ਵੀ ਹੁੰਦਾ ਕੰਨੇ ਉੱਤੇ ਰਿਹਾ ਉਹ ਬੱਚਾ ਸੀ ਉਹ ਮੂੰਹ ਦੇ ਵਿੱਚ ਹੋਰ ਜੋ ਗੱਲ ਤਾਂ ਜਵਾਨ ਨੂੰ ਬਗਾ ਪਤਾ ਹੈ। ਉਹਨੇ ਫਖੜਾ ਮੂੰਹ ਚ ਪਾ ਲਿਆ ਜਾ ਉਹ ਮੂੰਹ ਬਰੀਕ ਬਰੀਕ ਸੀ ਕੱਢੇ ਥੱਲੇ ਵੀ ਗੱਟ ਗਿਆ ਤੇ ਵੀ ਤੱਕ ਉਸ ਫਖੜਾ ਨਾਲ ਧਾਂ ਜਾਂਦਾ ਨਾਲ ਖਾਲ ਜਾਂਦਾ। ਜਿਆ ਕਰੀ ਜਾਂਦਾ ਉਹ ਕਿਆ ਮਰ ਗਿਆ। ਉਸੇ ਕਹਿੰਦੇ ਕਿ ਆਇਆ ਇਹਦਾ ਮੂੰਹ ਚ ਬਖੜਾ ਪਾਸਤਾ ਗੁਰੂ ਕਹਾ ਕੇ ਨਾ ਨਾ ਜੱਡ ਸਕਦੇ ਨੇ ਉਹਦੇ ਨਾ ਉਹਦਾ ਬਖੜਾ ਬਾਹ ਨਿਕਲਦਾ ਨਾ ਦਰਜਾ ਮੈਂ ਉੱਧਰ ਦਾ ਕਾਲੀਆਂ ਦਾ ਗੁਰਬਾਣੀ ਬਦਲੀ ਕੀਤੀ ਉਸੀ ਬਹੁਤ ਗੁਰੂ ਜਗਤ ਕਾ ਸੁਭਤ ਕੰਕਾ ਗੁਰਨਾਏ ਭਾਈ ਗੁਰੂ ਕੀ ਜਾਤੇ ਪਰਮਾ ਗੁਰੂ ਵੀ ਤਾਂ ਰੰਝਾ ਕੀਦੀ ਹੋਈ ਹੈ ਗੁਰੂ ਵੀ ਨੇ ਦਿਆ ਕੀਤੇ ਗੁਰਬਾਣੀ ਦੇ ਇਹ ਗਾਉਂਨ ਅੱਗੇ ਵੀ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਉਹ ਤੀਜੀ ਪੀੜੀ ਆ ਗਈ ਗੁਰ ਚਦਗੁਰੇ ਉਹ ਰਮਦਾਸ ਜੀ ਆ ਗਏ ਪੱਤਾ ਸੀ ਇਹਨਾਂ ਕੋਲ ਫੇਰ ਆਏ ਬਟੇ ਹੋ ਕੇ ਇਹਨਾਂ ਨੇ ਵਿਚਾਰਿਆ ਉਹ ਚਲੋ ਭਾਈ ਗੱਲ ਸੁਣੋ ਜੇ ਗੋਲ ਨਾਲ ਤੱਕ ਤੋਂ ਤੁਸੀਂ ਨਹੀਂ ਲੈ ਸਕਿਆ ਗਿਆਨ ਤਾਂ ਇਹ ਦੁਨੀਆਂ ਪਬਲਿਕ ਦੇ ਅੰਦਰ ਬੰਦੀ ਚਲੀ ਗਈ ਖਾਲੇ ਹੋਈ ਨਾ ਠੀਕ ਹੈ ਜੀ ਫਿਰ ਉਹਨਾਂ ਦਾ ਚਲੀ ਗਈ ਇਹਨਾਂ ਗੋਲ ਨਾਲ ਜੋ ਵੀ ਜਿੱਤਲੇ ਦੀ ਇਹ ਵੀ ਯਾਰ ਹੋ ਗਈ ਗੱਲ ਉਹ ਕਮਜ਼ੋਰ ਧੜਾ ਸੀ ਜਿਹੜਾ ਮਜਬੂਰੀ ਵਾਸਤੇ ਰਹਿੰਦਾ ਰਹੇ ਹੋਣ ਪ੍ਰਕਾਸ਼ ਦੇ ਨਾਲ ਜੇ ਗੱਲ ਬੁਰਾ ਕਰਨਾ ਹੈ ਮਦਦ ਹੋ ਜਾਂਦੀ ਹੈ ਲੋਕੀ ਕੰਨ ਚ ਚਲਦੀ ਰਹੂਗੀ ਕੋਈ ਇਹਦੀ ਬੀਲਿੰਗ ਵਿਚਾਰ ਵਿਚਾਰਿਆ ਨਾ ਨੇ ਵਿਚਾਰਿਆ ਵੀ ਇਹਨਾਂ ਦੇ ਹੱਥੇ ਵਿਚਾਰੇ ਨੇ ਇਹ ਤਾਂ ਬਸ ਇਹਨਾਂ ਦੀ ਤਾਂ ਡੋਰ ਪਿੱਛੇ ਜੁਲਦੀ ਹੈ ਚਲੋ ਕਾਈਂ ਰੇ ਕਰੋ ਜੇ ਜੱਤ ਹੋਤੇ ਤੋ ਹੀ ਲਾਇਆ ਹੋਇਆ ਕੋਈ ਵਜ੍ਹਾ ਹੋਗੀ ਚਲੋ ਕਿਸੇ ਦੀ ਵੀ ਗਲਤੀ ਸੀ ਬੰਨ ਲਿਆ ਕੋ ਨਾਨਕ ਦਾ ਸੁਭਾਅ ਲੈਣਾ ਸੀ ਚਲੋ ਲੈਂਦੇ ਅਸੀਂ ਮੰਨ ਲੈਂਦੇ ਵੀ ਤੋ ਅਲੂ ਗੂ ਲਾਇਆ ਤੋ ਕਿਉਂ ਠੇਕ ਕੀਤਾ ਖੁਰਨਾ ਜੋ ਹੁਣ ਲੈ ਲੋ ਹੋ ਗਿਆ ਹੁਣ ਜਿਹੜਾ ਵਿਆਹ ਹੋ ਗਿਆ ਗਿਆ ਨੂੰ ਹੁਣ ਟੋਕ ਬੋਲ ਲੋ ਕਿਆ ਬਰਤੀਏ ਨੋਰੀ ਵੀ ਆ ਕੇ ਅਸੀਂ ਤੇ ਦੇ ਗਿਆਨ ਬੈਠੋ ਸੰਤ ਵਿੱਚ ਸਤਿ ਸਲੋ ਉਕਤ ਵਿਹਾ ਹੋ ਗਿਆ ਹੈ ਹੁਣ ਆਪਣਾ ਆਪਣਾਣਾ ਬਿਨਾਂ ਦੀ ਇਹ ਚੌਥੀ ਪੀੜੀ ਤੇ ਕਿਹਾ ਨਾ ਚੌਥੀ ਪੀੜੀ ਕੇ ਗੁਰੂ ਚੌਥਾ ਗੁਰ ਚੌਥੀ ਪੀੜੀ ਗੁਰੂ ਜੀ ਇੱਕ ਉਹ ਤੇ ਵੀ ਇਹ ਰਾਮਵਾਸ ਤੇ ਸਰੀਰ ਦੇ ਵਿੱਚ ਪ੍ਰੇਸ਼ਕਾ ਪੈਦਾ ਹੋਇਆ ਉਹਨਾਂ ਦੁਸ਼ਤਾਂ ਨੂੰ ਦਿਕ ਸਭ ਕਹ ਰਹੇ ਉਹ ਦੇ ਵਿੱਚ ਸੁਣੀ ਜਾਓ ਜੀ ਨਾ ਬੰਨਣਾ ਬੰਦਿਓ ਬਈ ਸੁਣ ਲੋ ਸਭ ਸਭ ਨੂੰ ਆਗਿਆ ਸੁਣਨੀ ਬੈਠ ਕੇ ਦੀ ਚੁੱਪ ਕਰਕੇ ਜੀ ਤੇ ਨਹੀਂ ਬੰਨਣਾ ਕੋਈ ਦਿਲਿਆ ਕੰਮ ਵਾਲਾ ਸਾਡਾ ਉਹਦੇ ਨਾਮੇ ਕੋਈ ਵਹਿਰਦੀ ਵੀ ਕੋਈ ਵਹਿਰਦੀ ਜਿਹੜਾ ਕੇ ਬਾਤ ਵਿਚਾਰ ਲਿਓ ਥੋੜੂ ਬੁਰਾ ਲੱਗਿਆ ਨਾ ਬਦਿਓ ਸੱਭਾ ਲੱਦਿਆ ਮੰਨ ਲਿਓ ਜਾ ਲੱਗ ਲੱਗਰ ਪਾਣੀ ਧਾਰੀ ਚੱਕੋ ਕੋਈ ਗੱਲ ਨਹੀਂ ਨੱਗਲ ਤੇ ਸਭ ਦਾ ਹੱਥ ਹੈ ਠੀਕ ਹੈ ਜੀ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੀ ਜੇ ਕੋਈ ਸਿੱਖ ਸਤਿਗੁਰੂ ਦੇੇ ਰਹਾ ਬਣੇ ਕੋਈ ਸਿੱਖੀ ਹੋਵੇ ਇਤਾ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੀ ਸਤਿਗੁਰੂ ਦੀ ਸੇਵਾ ਗੁਰੂ ਦੀ ਲਹਿਰ ਗੁਰੂ ਦੀ ਸੇਵਾ ਹੀ ਆਸਲ ਦੇ ਕੋਈ ਇਹ ਸਾਬੇ ਸ਼ਾਬਦੋ ਵਿਚਾਰ ਕੇ ਆਪਣੀ ਜ਼ਿੰਦਗੀ ਨੂੰ ਸੋਝ ਹੋਣ ਵਾਸਤੇ ਲਾ ਦੇ ਦੂਜਿਆਂ ਨੂੰ ਸਮਝਾਉਣ ਵਾਸਤੇ ਲਾ ਦੂਜਿਆਂ ਨੂੰ ਸਮਝਾਉਣ ਵਾਸਤੇ ਲਾ ਕੋਈ ਸਿੱਧ ਪੁੱਤ ਉਹ ਗੁਰੂ ਦੀ ਸੇਵਾ ਕਰੇ ਉਦੇ ਸਾਰੇ ਕਾਰਜ ਸੌਰ ਜਾਂਦੇ ਨੇ ਜੇ ਜਨੂ ਨੂੰ ਆਪਣੇ ਲਾ ਦੇਵੇ ਜਦੋਂ ਲੈ ਕੇ ਲਾਦੇ ਆਪ ਪਹਿਲਾ ਆਪ ਪਹਿਲਾ ਪੜੇ ਸੁਰੇ ਸਭ ਕੇ ਤੇ ਉਹਨੂੰ ਗਾਹ ਸਮਝਾਉਣ ਦੇ ਲੈ ਕੇ ਲਾਵੇ ਰੱਖਾਂ ਪਹਿਲਾਂ ਉਹਨਾਂ ਦੀ ਸੇਵਾ ਕਰੇ ਉਹਦੇ ਸਾਰੇ ਕਾਰਜ ਸੌਰ ਜਾਂਦੇ ਉਹਦਾ ਲੋਕ ਪਰ ਲੋਕ ਸਬਰ ਜਾਂਦਾ ਠੀਕ ਹੈ ਜੀ ਜੋ ਇੱਕ ਛੋਫਲ ਪਾਈ ਕੀ ਉਤਤਨ ਲక్ష్ਮੀ ਫੜ ਮੇਲੇ ਹਰ ਨਸਤਾਰੀ ਅਜੋ ਕੱਬਰ ਦਾ ਹੋ ਕੋਈ ਭਾਵਨਾ ਕੁਨਾਪ ਤਾਂ ਉਹਦੀ ਚਾਬੀ ਨਹੀਂ ਹੁੰਦੀ ਉਹਦੀ ਤਾਂ ਸਿਰ ਲੋਕ ਤੇ ਮੈਨੂੰ ਉਦੋਂ ਕੁਝ ਹੋਰ ਐਸੇ ਪੁਰਸ਼ ਦੀ ਚਾਹ ਨਹੀਂ ਹੁੰਦੀ ਕੁਝ ਨਾਮ ਤੋਂ ਵੀ ਚਾਲਮਾ ਰਾਨੇ ਕਾ ਬੋਮ ਦੇ ਜੋਗਨਾਨ ਕਿਤੋਂ ਕਰੋ ਹੋਰੇ ਜੋ ਕਿ ਕੋਈ ਗਲ ਪਾਇਸੀ ਜੋ ਜੇ ਸੋ ਫਲ ਪਾਇਸੀ ਜੋ ਵੀ ਚੌਂਦੀ ਉਹਨੂੰ ਫਲ ਮਿਲ ਜਾਂਦਾ ਉਹਦੀ ਚੌਂਦੀ ਦੀ ਉਸੂੰ ਪੁੱਤਰ ਤਾਂ ਲੱਖਵੇਂ ਹੜ ਵੇਲੇ ਹਲ ਵਿਸਤਾਰੇ ਉਹ ਪੁੱਤਰ ਪਾਨ ਸੱਚੇ ਸਾਰੇ ਗੁਰੂ ਦੇ ਆਪਰ ਕਰਕੇ ਆ ਬਾਇਆ ਅੱਛਾ ਜੀ ਲక్ష్ਮੀ ਅਸਲ ਜਿ ਮਾਇਆ ਵੀ ਨਹੀਂ ਹੁੰਦੀ ਹੁੰਦੀ ਹੈ ਅੱਛਾ ਜੀ ਹਾਂ ਜੇ ਜਿਹੜੀ ਨੇ ਦਰਸ਼ਨ ਕਰਨਾ ਉਹਨੂੰ ਲਖਮੀ ਕਹਿੰਦੇ ਨੇ ਅੱਛਾ ਜੀ ਲਖੜਾ ਹੁੰਦਾ ਦੇਖਣਾ ਜਿਹੜੀ ਮੈਨੂੰ ਦੇਖ ਸਕਦੀ ਆ ਉਹ ਤਾਂ ਅੱਛਾ ਜੀ ਉਹ ਇੱਕ ਬੁੱਧੀ ਠੀਕ ਹੈ ਫਿਰ ਲਖਵੀ ਮਾਇਆ ਨੂੰ ਹੈ ਮਾਇਆ ਨਹੀਂ ਹੁੰਦੀ ਲਖਵੀ ਅਸੇ ਦਾ ਲਿਖਿਆ ਲਖੜਾ ਹੁੰਦਾ ਇੱਕਦਮ ਅੱਛਾ ਆਦਮ ਦਰਸ਼ਨ ਕਰਤ ਵੰਦੇ ਵੀ ਇਹਨਾਂ ਨੂੰ ਕਿਹਾ ਪੁੱਤ ਤੇ ਧੰਨ ਕੌਣ ਹੈ ਪੁੱਤ ਗਿਆਨ ਹੈ ਅੱਛਾ ਜੀ ਤਾਂ ਬੁੱਧੀ ਹੈ ਠੀਕ ਹੈ ਜੀ ਬੁੱਧੀ ਲਖਮੀ ਹੈ ਗਿਆਨ ਦਾ ਜੋ ਪੈਦਾ ਕੀਤਾ ਹੈ ਠੀਕ ਕਬੀਰ ਕਹਿਣਾ ਨਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਵਿਦਿਆ ਲੜਕੀ ਹੈ ਪੁੱਤ ਗਿਆਨ ਦਾ ਠੀਕ ਹੈ ਜੀ। ਲੱਖਵੀਂ ਬੁੱਧੀ ਹੈ। ਹੂੰ ਹੂੰ। ਤੇ ਖੜ ਮੇਲੇ ਭਾਬਾਂ ਲੈ ਕੇ ਹਾਲ ਦੇ ਚਲ ਵਿੱਚ ਸਾਰੇ। ਠੀਕ ਜੀ। ਸਭ ਛੌਂਫ ਗੁਰ ਕੋਹ ਪਾਈ ਕਈ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਤਾਰੇ ਤੇ ਪਾਏ ਪੂਰਾ ਸਤਿਗੁਰੂ ਲਿਖਿਆ ਲਿਖਤ ਲਿਲਾ ਰਹੀ ਸਭਨਾ ਦਾ ਜਿਹੜੇ ਵੀ ਖਜਾਂ ਦੇ ਸਤਿਗੁਰੂ ਵਿੱਚ ਹੁੰਦੇ ਅੱਛਾ ਜੀ ਜਿਹੜੇ ਵੀ ਖਜਾਂ ਦੇ ਦਾ 10 ਠਾਕੁਰ ਕਰਤਵ ਜਿਤੇ ਵੀ ਪਦਾਰਥ ਨੇ ਸਾਰੇ ਸਤਿਗੁਰੂ ਦੇ ਵਿੱਚ ਹੀ ਨੇ ਬਾਹਰੋਂ ਕੀ ਆਉਂਦਾ ਠੀਕ ਉਹਦੇ ਹੁਕਮ ਦੇ ਵਿੱਚ ਹੀ ਨੇ ਗੁਰੂ ਵਿੱਚ ਹਾਂ ਜਿਸ ਅੰਦਰ ਹਾਰ ਆ ਜਿਹਦੇ ਹਿਰਦੇ ਚ ਪੈਦਾ ਕਰਦੇ ਜਿਹਦੇ ਹਿਰਦੇ ਚ ਆਪ ਜਾ ਬੈਠੇ ਉੱਤੇ ਸਾਰੇ ਹੀ ਖਜ਼ਾਨੇ ਚਲੇ ਜਾਂਦੇ ਸ਼ਬਦ ਗੁਰੂ ਪ੍ਰਗਟ ਹੋ ਜਵੇ ਉੱਤੇ ਸਾਰੇ ਖਜ਼ਾਨੇ ਚਲੇ ਜਾਂਦੇ ਜੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੀ ਜੋ ਪਾਏ ਪੂਰਾ ਸਤਿਗੁਰੂ ਪੂਰਾ ਸਤਿਗੁਰੂ ਉਹੀ ਪੁੰਦਾ ਉਸ ਨੂੰ ਪ੍ਰਾਪਤ ਹੁੰਦਾ ਜਿਸ ਲਿਖਿਆ ਲਿਖਤਾ ਲਿਲਾਵੇ ਪਹਿਲਾਂ ਮੈਂ ਇਤੋਂ ਘੱਟ ਕੁਝ ਲੈਣਾ ਹੀ ਦੀ ਕੋਈ ਦੀ ਬਸਤਾ ਹੈ ਮੁਕਤੀ ਤੋਂ ਬਾਹਰ ਦਾ ਉਹਨੂੰ ਮਿਲਦਾ ਹੈ ਤਾਂ ਉਹਦੇ ਮੁਕਤਬ ਪਰਿਵਿ ਜਾਨੀ ਤਿਆਗਣ ਮੁਕਤੀ ਮੰਕਰ ਹੋਏ ਬਾਦ ਦੀ ਵਿਵਸਥਾ ਹੈ ਮੁਕਤੀ ਦਾ ਮੌਤੀ ਵਿਸਥਾ ਹੈ ਮਰਤੀਉ ਦਾ ਪਦ ਹੈ ਮਰਤੀਉ ਤੋਂ ਜੀਵਨ ਮੁਕਤ ਸੋ ਆਖੀਏ ਮਰ ਜੀਵੇਂ ਮਰਿਆ ਮੁਕਤੀ ਲੈ ਕੇ ਜੁੰਦਾ ਹੋਇਆ ਹੋਇਆ ਹੈ ਵਾਕੀ ਬਤਾਲ ਮੁਕਤੀ ਤੋਂ ਗਾਂ ਦੀ ਗੱਲੇ ਨਹੀਂ ਕਰਦੀ ਹਾਂ ਸੱਲ ਜਾਣਦੀ ਐ ਜੀ ਵਾਕੀ ਬਤਾਲ ਮੁਕਤੀ ਤੋਂ ਗਾਂ ਜਨ ਨਾਨਕ ਮੰਗੈ ਢੂੜ ਤਿਨ ਜੋ ਗੁਰਸਿੱਖ ਮਿੱਤ ਪਿਆਰੇ ਜਨ ਨਾਨਕ ਮੰਗੈ ਢੂੜ ਤਨ ਜਲੋੜੀ ਚਾਉਂਦੇ ਨਹੀਂ ਢੂੜਨਗੇ ਉਨਾ ਦਾ ਜੋ ਮੂਤੋ ਵਾਅਦਾ ਹੋਇਆ ਉਹਦੇ ਵਿੱਚ ਜਿਹੜੇ ਬਿਆਨ ਸੀ ਤੋੜ ਰੁੱਦਦਾ ਜੁਗਮਤ ਪਿਆਰੇ ਜੋ ਗੁਰਸਿੱਖ ਮਤੇ ਗੁਰ ਤੇਗ ਬਤ ਪਿਆਰੇ ਨੇ ਦੀ ਤੋੜ ਰੁੱਦ ਕਵੀ ਬੁੱਧ ਦਾ ਹੀ ਜਿਨ ਕੋ ਆਪ ਦੇ ਵਡਿਆਈ ਜਗਤ ਵੀ ਆਪੇ ਆਣ ਤਿੰਨ ਪੈਰੀ ਪਾਏ ਜਿਸ ਕੋ ਆਪ ਦੇ ਬੜਿਆਈ ਜਿਹਦੇ ਪਰਮੇਸ਼ਰ ਆਪ ਬੜਿਆਈ ਦੇਦੇ ਵੇ ਬੜਿਆਈ ਕੀ ਦੇਦੇ ਅੰਦਰ ਪੂਰਾ ਚਾਣੂ ਕਰਦੇ ਵੇ ਸੂਰਜ ਚੜ੍ਹ ਰੂਪ ਚ ਪ੍ਰਗਟ ਹੋ ਜਾਵੇ ਉਹਨਾਂ ਦੇ ਅੰਦਰ ਪਰਮ ਦਾ ਨਾਸ ਕਰਦੇ ਵੇ ਪਰਮ ਨੇ ਨਾਸ ਕਰਨ ਵਾਲੇ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਕਿੰਨਾ ਵਿਸ਼ਾਲ ਹੋ ਜਾਂਦਾ ਹੈ ਬ੍ਰਹਮ ਗਿਆਨੀ ਪ੍ਰਕਾਸ਼ ਜੈਸੇ ਤਾਰੂ ਪਰ ਆਕਾਸ਼ ਤਾਰੂ ਉਪਰ ਆਕਾਸ਼ ਹੈ ਇਹਨੇ ਢੇਰੇ ਬਾਕੀ ਢੇਰਾ ਤੇ ਹੈ ਹੀ ਕੇ ਪ੍ਰਕਾਸ਼ ਹੈ ਜਿੱਥੇ ਤੱਕ ਆਕਾਸ਼ ਹੈ ਉੱਦੇ ਤੱਕ ਢੇਰਾ ਹੈ ਉਦੋਂ ਕੇ ਪ੍ਰਕਾਸ਼ ਹੈ ਪ੍ਰਕਾਸ਼ ਇਸ ਵਰਤੇ ਸਦੇ ਵਿੱਚ ਵੀ ਪ੍ਰਕਾਸ਼ ਹੈ ਹੁੰਦਾ ਪ੍ਰਕਾਸ਼ ਦੀ ਉਦਾ ਪ੍ਰਕਾਸ਼ ਤਾਂ ਚੰਦ ਸੂਰਜ ਦਾ ਹੁੰਦਾ ਗਿਆਨ ਦਾ ਪ੍ਰਕਾਸ਼ ਹੁੰਦਾ ਠੀਕ ਹੈ ਜੀ ਹਾਂ ਜੀ ਜਗਤ ਵੀ ਆਪੇ ਆਣ ਤਿੰਨ ਕੋ ਪੈਰੀ ਪਾਏ ਜਗਤ 'ਚ ਆਪਣੇ ਆਪੇ ਵੀ ਗੱਲ ਠੀਕ ਹੈ ਕੀ ਕਰੇ ਜਗਤ ਸੱਚ ਨੂੰ ਤਾਂ ਸੱਚ ਬੋਲਣਾ ਹੀ ਪੈਂਦਾ ਠੀਕ ਹੈ ਜੀ ਜਗਤ ਨੂੰ ਸੱਚ ਦੀ ਲੋੜ ਹੈ ਲੋੜ ਰਹਦੀ ਹੈ ਪਰ ਸੱਚ ਨੂੰ ਐਸਾ ਬੱਬਲ ਬੂਸੇ ਪਾਇਆ ਇਹਨਾਂ ਲੋਕਾਂ ਨੇ ਵੱਡੀ ਵੱਡੀ ਮੋਟਾ ਵਾਲਿਆਂ ਦੇ ਲੋਕਾਂ ਕੋਲ ਬੁੱਧੀ ਥੋੜੀ ਹੁੰਦੀ ਹੈ ਇਹਨਾਂ ਕੋਲ ਬੁੱਧੀ ਜ਼ਿਆਦਾ ਹੁੰਦੀ ਹੈ। ਜ਼ਿਆਦਾ ਤੇ ਲੋਕਾਂ ਕੋਲ ਬੁੱਧੀ ਥੋੜੀ ਹੁੰਦੀ ਹੈ ਉਹਦੇ ਦਾਸ ਦੇ ਵਿੱਚ ਪਰ ਕੋਈ ਜ਼ਿਆਦਾ ਬੁੱਧੀ ਵਾਲਾ ਜ ਪੈਦਾ ਹੁੰਦਾ ਇਹਨਾਂ ਦਾ ਬਲਟਾ ਮਾਰ ਦਿੰਦਾ। ਠੀਕ ਹੈ ਬੁੱਧੀ ਵਾਲੇ ਪੈਦਾ ਹੁੰਦੇ ਨੇ ਨਾ ਫੇਰ ਉਹਨਾਂ ਕੋਲ ਟੇਤ ਹੈ ਕਿਉਂਕਿ ਉਹਨਾਂ ਦੇ ਕੰਨ ਉਹ ਝੰਡਾ ਘੜ ਨਾ ਕਹਿੰਦੇ ਨੇ ਆਉ ਤੁਹਾਡੇ ਨਾਲ ਘੋੜੋ ਫੇਰ ਪਾਈਦੇ ਨੇ ਫੇਰ ਹੀ ਡੇਉਂਦੇ ਉਹ ਚੰਦੇ ਦੇ ਨੇ ਬੰਦਾ ਹੋਰ ਅਪਾਉ ਕਰਦੇ ਨੇ ਵੀ ਇਹ ਤਾਂ ਕਿੰਨੇ ਪੰਜਾ ਕੇ ਬਣੇ ਹਾਂਜੀ ਡਰੀਏ ਤਾਂ ਜੇ ਕਿਛ ਆਪਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਕਰਤਾ ਉਹ ਤਾਂ ਆਪ ਕੁਛ ਕਰਦਾਈ ਦੀ ਉਹ ਤਾਂ ਭਾਂਡੇ ਚਲਦਾ ਹੈ ਉਹਨੂੰ ਕਿਸੇ ਜੀ ਦਾ ਦਰਦੀ ਉਹਨੇ ਆਪ ਕੁਛ ਨਹੀਂ ਕੀਤਾ ਜੋ ਕੀਤਾ ਕਰਤੇ ਨਹੀਂ ਕੀਤਾ ਕਰਤੇ ਤਾਂ ਆਪ ਕੁਛ ਕੀਤਾ ਨਹੀਂ ਉਹ ਕਿਸੇ ਦਾ ਦਰਦੀ ਹੈ ਦੇਖੋ ਭਾਈ ਸੱਚੇ ਦਾ जिन अपने जोर सब आन निभाए देख लो खाना ए खाना है करता चड्डा लेके अखाड़े दे बीच सच्चे प्रीतब ने ए खाना हरप्रीत पु का गुरु अंगद ने करता अखाड़े पहला सबतों सतवास से लिखे है ਲੋਕੀ ਕਹਿੰਦੇ ਨੇ ਕੀ ਕਰ ਦਿੰਦੇ ਆ ਇਹ ਤਾਂ ਗੱਲ ਕਰਦੇ ਨੇ ਸਭ ਦਾ ਸ਼ੇਰ ਉਹਨਾਂ ਦਾ ਕਰੀ ਜਾਂਦੇ ਨੇ ਇੱਥੇ ਆ ਕੇ ਜੰਨਾ ਗੱਡੇ ਆ ਦੇ ਆ ਕਾੜਾ ਹਰਪੀਤ ਸੁੱਚੇ ਦਾ ਸੱਚੇ ਦਾ ਹਨ ਵਰਤਾਜ ਨਾ ਖਾਲਸੇ ਨੇ ਜਿਹਨੇ ਆਪਣੇ ਜੋਰੀ ਸਭ ਆਉਣ ਨਵਾਏ ਹਰ ਸੱਚੇ ਦੀ ਸ਼ਕਤੀ ਨਾਲ ਸਾਰੇ ਨੀਵੇਂ ਹੋਣਗੇ ਆਦਮੀ ਦੀ ਕੋਈ ਸ਼ਕਤੀ ਨਹੀਂ ਹੈ ਸੇ ਆदमी ਕੋਈ ਵੀ ਹੋਵੇ چاہے ਕੋਈ ਧਰਤ ਸੀ چاہے ਕੋਈ ਸਿੱਖ ਸੀ چاہے ਕੋਈ ਗੁਰਮੁਖ ਹੋਵੇ Shakti ਪਿੱਛੇ ਜਿੱਲੀ ਕਰਦੀ ਹੈ Shakti ਕਬ ਕਰਦੀ ਹੈ ਉਹ ਆਪੇ ਕਬ ਹੈ ਸਿੱਖੇ ਠੀਕ ਹੈ ਉਹਨਾਂ ਬਲਾਆ ਬਹੁਤ ਹੁੰਦਾ ਮੁਕਾਬਲਾ ਕਰੂਗਾ ਕੋਮ ਜੀ ਆਪਣੇ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਤਾਂ ਕੇ ਮੂੰਹ ਕਾਲੇ ਕਰਾਈ ਜੀਤੋ ਆਏ ਜਾਨਕਾ ਹੁੰਦਾ ਜਿਹਨੂੰ ਮਜ਼ਾਲ ਚ ਲੈ ਕੇ ਆਉਂਦਾ ਨਾ ਅਖਾੜੇ ਚ ਥਾਪੀ ਦੇ ਕੇ ਫਿਰ ਕਾਪੀ ਦਿੱਤੀ ਕੰਡ ਜੀਅ ਚ ਉਹ ਪ੍ਰਗਟ ਸੱਚਾ ਉਹ ਰਾਖੀ ਵੀ ਆਪਣੇ ਬਖਸ਼ਾਂ ਦੀ ਆਪ ਕਰਦਾ ਪਿੱਛੇ ਉਹੀ ਰੜਦਾ ਉਹਦੇ ਬਿਨਾ ਕੀ ਦੀ ਹਮਤਾ ਅਖਾੜੇ ਚ ਆਜੂਗਾ ਥਾਪੀ ਲਾ ਕੇ ਸਾਡੀ ਦੁਨੀਆ ਨੂੰ ਲਲਕਾਰ ਦੂਆ ਕੇ ਕਿਵੇਂ ਜੱਤ ਗੱਲ ਹੈ ਆਪਣਾ ਭਗਤਾਂ ਦੀ ਰੱਖ ਕਰੇ ਹਰ ਥੋਬੀ ਬਿਸਕਾ ਸੁਸ਼ੂ ਕੇ ਨੂੰ ਕਾਲੇ ਕਰਾਏ ਆ ਦੇ ਮੂੰਹ ਕਾਲੇ ਹੋਏ ਲੈ ਲਿਓ ਥੋੜੇ ਜਿਹਾ ਰਹਿ ਗਿਆ ਪਿੱਛੇ ਹੁੰਦੇ ਆ ਜੀ ਸਤਿਗੁਰੂ ਕੀ ਵਡਿਆਈ ਨਿਤ ਚੜ੍ਹੇ ਹਰ ਕੀਰਤ ਭਗਤੀ ਨਿਤ ਆਪ ਕਰਾਈ ਸਾਡਪੁਰ ਦੀ ਵਡਿਆਈ ਨ ਚੜੇ ਸਵਾਈ ਸਾਡਪੁਰ ਦੀ ਜਿਹੜੀ ਵਡਿਆਈ ਹੁੰਦੀ ਹੈ ਨ ਚੜੇ ਸਵਾਈ ਜਿੱਤੇ ਜਿੱਤੇ ਸਵਾਈ ਚੜਦੀ ਹੈ ਉਹ ਤੇ ਹੁੰਦੀ ਹੈ ਸਵਾਗਤ ਕੌਣ ਹੈ ਉੱਪਰ ਜਿਹੜੀ ਪੰਕਤੀ ਕਹੀ ਹੋਈ ਹੈ ਕਿਹਦੇ ਵਾਸਤੇ ਕਹੀ ਹੋਈ ਹੈ ਜਿਹਦੀ ਰੱਖਿਆ ਕਰਦਾ ਕੌਣ ਹੁੰਦਾ ਉਹਦੇ ਨਿਸ਼ਾਨੀ ਆ ਹਰ ਇੱਕ ਆਦਮੀ ਦਾ ਦਾਵਾ ਕਰ ਸਕਦਾ ਇਸ ਗੱਲ ਦਾ ਸਤਪੁਰਬ ਦੀ ਸਵਾਈ ਕਾਇਆ ਤੇਗਾ ਨਹੀਂ ਤਰੋ ਉਹਦੇ ਵਾਸਤੇ ਨਾ ਤੇ ਸਵਾਈ ਵਡਿਆਈ ਚਲਦੀ ਹੈ ਗਾਂ ਤੇ ਗਹੋ ਬਲ ਜਾਂਦੀ ਹੈ ਗਾਂ ਤੇ ਘਾਹ ਰੋਜ ਜਾਂਦੀ ਹੈ ਗੱਲ ਨਾ ਤੇ ਸਵਾਈ ਹਰ ਤੀਰਤੀ ਭਗਤ ਭਗਤੀ ਦਿੱਤ ਆਪ ਕਰਾਏ ਉਹਤੇ ਹਰ ਕੀਰਤੀ ਆਪਣਹਾਰਾ ਆਪਣੀ ਕੀਰਤੀ ਹੈ ਭਗਤੀ ਆਪ ਕਰਾਉਂਦਾ ਉਹਦੇ ਬਸਤੀ ਚੱਲਨੀ ਹੈ ਉਹ ਤਾਂ ਤੁਹਾਡੇ ਵਰਗੀ ਹੈ ਜੇ ਜੇ ਤੁਸੀਂ ਹੋਏ ਜੋ ਉਹ ਕਰਾਉਣ ਵਾਲਾ ਹੋ ਰਿਹਾ ਕਲਾ ਕਿਸੇ ਹੋਰ ਦੀ ਵਰਤਦੀ ਹੈ ਕਲਾ ਤਾਂ ਵਾਇਰਲ ਵੀ ਵਰਤਦੀ ਹੈ ਇਹ ਲੋਕ ਉਹ ਆਦੀ ਕਰਦੇ ਨੇ ਤੇ ਮੋਰ ਖਦੀ ਦਾ ਫੋਰ ਕੋਲ ਨੇ ਕਹਿੰਦੀ ਹੈ ਕੁਰਬਾਨੀ ਦੇ ਵਿਸ਼ਵਾਸੇ ਨਹੀਂ ਨੂੰ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਵਸਾਏ ਅਨੰਦ ਨਾਮ ਜਪੋ ਗੁਰ ਸਿੱਖੋ ਹੋਏ ਗੁਰ ਸਿੱਖੋ ਅਨੰਦ ਲਗਾਤਾਰ ਦਿਨ ਰਾਤ ਨਾਮ ਜਪੋ ਆਪ ਨੂੰ ਸਮਝੋ ਨਾਮ ਕੀ ਉੱਦ ਨਾਮ ਬਾਰੇ ਬਹੁਤ ਬੜੇ ਭਲੇਖੇ ਪਾਏ ਹੋਏ ਨੇ ਨਾਮ ਕੁਰਬਾਨੀ ਵਿੱਚ ਸਭਾਇਆ ਹੋਇਆ ਜਿਹੜਾ ਵਖਣ ਹੈ ਉਹ ਹੈ ਇਹਨੂੰ ਰਿਤ ਕੇ ਖਾਓ ਕਢੋ ਕੁਰਬਾਨੀ ਹਰ ਨਾਮ ਸਭਾਇਆ ਕੁਰਬਾਨੀ ਵਿੱਚ ਜੋ ਤੱਕ ਗਿਆ ਨਾ ਉਹ ਹੀ ਲੋਬ ਹੈ ਕਰਤਾ ਸਾਧਪੁਰ ਘਰੀ ਵਸਾਈ ਲਿਆ ਉਹ ਫਿਰ ਤੇ ਵੇਜੂਆ ਕਾਰਾ ਉਹਨੂੰ ਜਗਾਜੂ ਸਰਦੇ ਚਿੱਤ ਨੂੰ ਉਹਦਾ ਗੁਰੂ ਸਾਰੇ ਬਸ ਜੰਗ ਦੇ ਕੋਈ ਝਗੜਾ ਵੀ ਰਹੂਗਾ ਕਿਸੇ ਦਾ ਦੁਨੀਆਂ ਦੇ ਝਗੜੇ ਸਿਰਫ ਨੇ ਇਹ ਸਾਰੀ ਦੁਨੀਆਂ ਨਾਲ ਵਿਚਫਲ ਸਾਰੇ ਕਰੇ ਸੇ ਖਤਮ ਹੋ ਜਾਂਦੇ ਸ਼ਾਂਤੀ ਆਪਣੇ ਆਪ ਹੋ ਜਾਂਦੀ ਹੈ ਕਿਸੇ ਤੋਈ ਦੀ ਕਿਸੇ ਪੁੱਤ ਦੀ ਕਿਸੇ ਪੈਰ ਦੀ ਕੋਈ ਲੋੜ ਨਹੀਂ ਫਰਦੂ ਦੇ ਕੋਣ ਕਰੇ ਕੋਣ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਕਢਾਏ ਸਤਗੁਰ ਦੀ ਬਾਣੀ ਹੈ ਨਾ ਸਮਝ ਲਿਓ ਕਹਿੰਦੇ ਨੇ ਜਿਤੇ ਮੇਰੇ ਬੋਲ ਸਮਝ ਲਵੋ ਬਲਤੀ ਨਾਲ ਗੁਰੂ ਆਪ ਦਾ ਬੋਲ ਨਹੀਂ ਹੈ ਕੁਝ ਕਹੇ ਹੋਏ ਹੈ ਕੀ ਬਾਣੀ ਇਹਨੂੰ ਸਤ ਸਤ ਕਰਕੇ ਮੰਨਿਓ ਗੁਰ ਸਿੱਖੋ ਤੁਹਾਡਾ ਨਾਮ ਕੀ ਆਪ ਜਿਹੜਾ ਹੈਗਾ ਰਾਮਦਾਸ ਬੋਲ ਰਿਹਾ ਰਾਮਦਾਸ ਕੋਈ ਵੀ ਬੋਲ ਰਿਹਾ ਰਾਮਦਾਸ ਇਹਦਾ ਬਲਵਾ ਰਿਹਾ ਹੋ ਗੁਰ ਸਿੱਖੋ ਹਰ ਕਰਤਾ ਆਪ ਉਹ ਵਧਾਏ ਉਹ ਬੇਰੇ ਗੁਰ ਘੜਾ ਰਿਹਾ ਜਬਰਦਸਤੀ ਉਹ ਕਣਵਾੜਿਆ ਮੈਂ ਕੱਢ ਰਿਹਾ ਮੇਰਾ ਮੈਂ ਤਾਂ ਬੋਲ ਰਿਹਾ ਬਲਵਾ ਰਿਹਾ ਇਹਨੂੰ ਠੀਕ ਹੈ ਬੁੱਜੇ ਨੇ ਆ ਕਬੀਰ ਕਹਿੰਦਾ ਹਾਂਜੀ ਕਬੀਰ ਜਿਨ ਕਥੇ ਜਨਾਂ ਕਬੀਰ ਕਹਿੰਦਾ ਕਬੀਰ ਜਿਨ ਕ ਜਾਨ ਲਾਈ ਤਿੰਨ ਸੁਖ ਦੀਦ ਵਿਆਹ ਹੈ ਉਹ ਅਨੰਦ ਨਾਲ ਸੁੱਤੇ ਪਏ ਨੇ ਰਬਾ ਜੋ ਬੁੱਜੇ ਨੇ ਪੁੱਛਿਆ ਰਬਾ ਜੋ ਪੂਰੀ ਭਰੀ ਬੁਲਾਏ ਸਾਨੂੰ ਗੱਲ ਵੀ ਸਮਝ ਆਈ ਹੈ ਸਾਡੇ ਬੁਲਾ ਗੱਲ ਪੈ ਗਈ ਹੁਣ ਬੁਲਾਉਂਦਾ ਤਾਂ ਅਸੀਂ ਬੋਲਦੇ ਬਲ ਬਲਾ ਪੂਰੀ ਐ ਗੱਲ ਪੂਰੀ ਐ ਅਧੂਰੀ ਗੱਲ ਨਹੀਂ ਐ ਪੂਰੀ ਪਰਿ ਬਲਾਏ ਇਹ ਕਰਤਾ ਪੁਰਖ ਆਪ ਘੜਾ ਰਿਹਾ ਹੈ ਹਾਂਜੀ ਗੁਰਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ ਗੁਰ ਜੈਕਾਰ ਸੰਸਾਰ ਸਬਤ ਕਰਾਈ ਗੁਰਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ ਗੁਰਸਿੱਖਾਂ ਦੇ ਮੂੰਹ ਉਜਲੇ ਕਰਦਾ ਹਾਂਜੀ ਜੋ ਜਿਨੇ ਹੋਣਾਂ ਦੀ ਗਿਆਨ ਅਭਿਆਸ ਦਾ ਦਾ ਨਾਮ ਛੋੜਨ ਹਿਰਦੇ ਉਜਲੇ ਕਰੇ ਮੁੱਖ ਜਿਲੇ ਦਾ ਮਤਲਬ ਹਿਰਦਾ ਜੈਕਾਰ ਸੰਸਾਰ ਦੇ ਵਿੱਚ ਉਹਨਾਂ ਦੇ ਗਿਆਨ ਦਾ ਜੈਕਾਰ ਸ਼ਬਦ ਹੋ ਜਾਂਦਾ ਹੈ ਜੈ ਜੈਕਾਰ ਹੋ ਜਾਂਦੀ ਹੈ ਆਮੇ ਆ ਗਿਆਨ ਚਲੇਗਾ ਗੱਲ ਆਏ ਸਰੇ ਸੀ ਐ ਗੱਲ ਦਾ ਜਵਾਬ ਨਹੀਂ ਹੈ ਠੀਕ ਹੈ ਜੀ ਜਨ ਨਾਨਕ ਹਰ ਕਾ ਹੈ ਹਰ ਦਾਸਨ ਕੀ ਹਰ ਜਨ ਨਾਨਕ ਹਰ ਕਾ ਦਾਸ ਹੈ ਜਨ ਨਾਨਕ ਦਾ ਹਰ ਕਾ ਦਾਸ ਹੈ ਉਹ ਨਾਨਕ ਦਾ ਦਾਸ ਹੈ ਕੰਨ ਗੁਰੂ ਅਨੰਦਪੁਰ ਤੱਕ ਕਿਉ ਤੀ ਬਤ ਮਾਰੀ ਹੋਈ ਹੈ ਗੁਰੂ ਕਹਿ ਕਹਿ ਕੇ ਆਪਨ ਕੋ ਜੋ ਉਹ ਆਪਨ ਜੋ ਯਾਰ ਨੇ ਵਿੱਚਾ ਸੋਈ ਜਾਣੀ ਸਭ ਤੋਂ ਉੱਚਾ ਉੱਚੇ ਦੀ ਸ਼ਾਦੀ ਇਹ ਆਪਣੇ ਹਰ ਦਾਸ ਪੈਜ ਰਖਾਏ ਹਰ ਜਿਹੜਾ ਹਾਰੇ ਉਹ ਵੀ ਕਰਦਾ ਆਪਣੇ ਦਾਸਾਂ ਦੀ ਪੈਜ ਰਖਉਂਦਾ ਰੱਖਦਾ ਉਹਨਾਂ ਦੀ ਇੱਜ਼ਤ ਬਚਾਉਂਦਾ ਕਿਤੇ ਉਹਦੇ ਦਾਸ ਬਣਦੇ ਨੇ ਪਰ ਜਿਹੜਾ ਉਹਦਾ ਦਾਸ ਵੀ ਉਹਦੀ ਇੱਜ਼ਤ ਬਚਣੀ ਹੋਣੀ ਹੈ। ਹੁਣ ਦੱਸੋ। ਜੇ ਨਾਨਕ ਗੁਰੂ ਉਹਦਾ ਜਿੰਨੀ ਸੀ ਬਚਦੀ। ਬਾਬਾ ਗੁਰੂ ਬਣਿਆ ਜਿੰਨੀ ਬਚੀ। ਗੋਰਨਾਥ ਗੁਰੂ ਬਣਿਆ ਬਚੀ। ਕੋ ਗੁਰੂ ਬਣੇ ਨੇ। ਅਖਤ ਗੁਰੂ। ਇੱਕ ਵੀ ਅਜੇ ਜਪਤ ਗੁਰੂ ਦਿਖਾਵੇ ਜੀ ਦੀ ਇੱਜ਼ਤ ਬਚੀ ਹੋਵੇ। ਠੀਕ ਹੈ ਇੱਜ਼ਤ ਨਹੀਂ ਬਚੇ ਤਾਂ ਆਦਮ ਜੀ ਕੋਈ ਵੀ ਨਹੀਂ ਹੈ। ਕੋਈ ਜਪਤ ਗੁਰੂ ਆਦਮ ਕਰੇ ਆਪਣੇ ਆਪ ਨੂੰ ਅਜੇ। ਕਾਸ ਤੰਗ ਕੇ ਆਤਮ ਦਸਤੀ ਹੋਊਗਾ ਜੇ ਕੋਈ ਨਹੀਂ ਬਚਣਗੇ ਕਦੀ। ਸਾਰੀ ਜਤ ਗੁਰੂ ਨਾ ਸਾਰੀ ਜਤ ਹੈ। ਦੁਨੀਆਂ ਦੀ ਵੜਾਈ ਹੈ, ਦੁਨੀਆਂ ਦੀਆਂ ਬਸਾਰ। ਇਹ ਵੜਾਈਆਂ ਨੇ ਤੁਹਾਨੂੰ ਬਸਾਰਤਾ। ਇੱਕੀ ਜਨ ਲੋਕ ਮੂਰਖ ਲੋਕ, ਇੱਕੀ ਜਨ। ਕੀ ਹੋ ਜਾਂਦਾ ਗੁਰੂ ਭਾਈ? ਮੂਰਖ ਦਾ ਦਾਸ ਕਹਾਇ ਤੇ ਕੀ ਹੁੰਦਾ। ਇਹ ਤਾਂ ਮੂਰਖ ਨੇ। ਠੀਕ ਹੈ ਜੀ। औरी तू सच्चा साहिब आप हैं सच शाह हमारे सच पूंजी नाम दरड़ाए प्रभु वन जारे थारे तू सच्चा साहिब आप हैं हे प्रभुेश्वर थारे रूपे सबते बदा हर सच्चा तू सच्चा ਤੁਹਾਇਵਤੋਂ ਆਪਈਆਂ ਹੋਰ ਕੋਈ ਦਿੱਕਤ ਨਾ ਸੱਚਾ ਸਾਹਿਬ ਦੀਆਂ ਬਰਬੂ ਬਿਸ਼ਰੂ ਸਿੰਘ ਜੀ ਵਾਲੀ ਗੱਲ ਕੱਟੀ ਗਈ ਕੋਈ ਸੱਚਾ ਸਾਹਿਬ ਦੀ ਹੈ ਪਾਪ ਹੈ ਸਤਿਸ਼ਾ ਹਮਾਰੇ ਹਮਾਰੇ ਆਂ ਸਾਡੇ ਵਾਸਤੇ ਕੀ ਆਂ ਥਾਲੇ ਤੇ ਤੋਂ ਨਾ ਦੇ ਜਿ ਆ ਜੋ ਮਿਲਦਾ ਤੇ ਤੋਂ ਨਾ ਜੋ ਸੌਦਾ ਮਿਲਦਾ ਤੇ ਤੋਂ ਮਿਲਦਾ ਸਾਡਾ ਛਾਹ ਤੂੰ ਸਕੇ ਕਾਕੇ ਸਾਹ ਹਮਾਰੇ ਸੱਚ ਪੁੰਜੀ ਨਾਮ ਤੇ ਲੜਾਏ ਬਣਜਾਰੇ ਨਾਮ ਬੁਲਾਏ ਪ੍ਰਭ ਬਣਜਾਰੇ ਥਾਰੇ ਜਿਹੜੇ ਤੇਰੇ ਬਣਜਾਦੇ ਨੇ ਉਹਨਾਂ ਨੂੰ ਕੀ ਕਰਦਾ ਤੂੰ ਸੱਚ ਪੁੰਜੀ ਨਾਮ ਦੇਣ ਕਰਾਉਂਦਾ ਸੱਚ ਪੁੰਜੀ ਨਾਮ ਸੱਚ ਨਾਮ ਦੇਣ ਸੱਚ ਦਾ ਗਿਆਨ ਦੇਣ ਕਰਾਉਂਦਾ ਪੱਕਾ ਹੋ ਜਾਂਦਾ ਫੈਸਲੇ ਦੀਆਂ ਕਿ ਤੂੰ ਬਾਰੋਂ ਬੀ ਬੋਲ ਦੇ ਦੀਆਂ ਉਹ ਜਦਲ ਕਰਾ ਦਿੰਦੇ ਜਾਂ ਪਹਿਲਾਂ ਪਹਿਲਾਂ ਹੁੰਦੇ ਨੇ ਪਹਿਲਾਂ ਪਹਿਲਾਂ ਬਾਰੋਂ ਬੀ ਬੋਲ ਵੀ ਜਲਦੇ ਨਹੀਂ ਕਦੇ ਤੇਰੇ ਵਰਨਾਰੇ ਦੇ ਉਹਨਾਂ ਨੂੰ ਸੱਚ ਦਾ ਨਾਮ ਸੱਚ ਦਾ ਉਪਦੇਸ਼ ਦਿੜ ਕਰਾਉਂਦੇ ਸੱਚ ਸੇਵ ਹੈ ਸੱਚ ਵਣੰਜ ਲੈ ਗੁਣ ਕਥੈ ਸੱਚ ਸੇਵਦੇ ਨੇ ਸੱਚ ਦੀ ਸੇਵਾ ਕਰਦੇ ਨੇ ਸੱਚ ਦਾ ਉਪਦੇਸ਼ ਦਿੰਦੇ ਨੇ ਵੱਡ ਬਣਦੇ ਨੇ ਸੱਚ ਦੇ ਸੌਦਾ ਸੱਖਾ ਕਰਦੇ ਨੇ ਲਾ ਗੋਹ ਅਕੱਠੇ ਬਿਰਾਲੇ ਅਜਿਹੇ ਤੇਰੇ ਗੁਣ ਨੇ ਨਾ ਬਿਰਾਲੇ ਬਿਰਾਲੇ ਗੁਣ ਇਹ ਪ੍ਰਾਪਤ ਕਰਦੇ ਨੇ ਉਹ ਬਿਰਾਲੇ ਗੁਣ ਜਿਹੜੇ ਨੇ ਫਿਰ ਫਿਰ ਪਾਉ ਦੋ ਗੁਣ ਬੋਸਤ ਦੇਰ ਬਾਅਦ ਆ ਮੇਰ ਪੋ ਅਦਾਲਤ ਨੂੰ ਤਗਰੇ ਹਇਓ ਇਹਦਾ ਤਾਂ ਰੌਲਾ ਨ ਮਰਜ਼ਾ ਦਾ ਆਤ ਨੂੰ ਸਹੀ ਦੀ ਜੇ ਇਹ ਦਿਆਲੇ ਗੁੰਦੇ ਦੋਏ ਗੁੰਦੇ ਨੇ ਦੋਏ ਸਾਰੇ ਗੁੰਦੇ ਲਾ ਜਾਂਦੇ ਈ ਗਿਆ ਜੀ ਸੇਵਕ ਭਾਏ ਤੋ ਜਨ ਮਿਲੇ ਗੁਰ ਸ਼ਬਦ ਸਵਾਰੇ ਸੂਤ ਸਚਾ ਸਾਹਿਬ ਲਖ ਹੈ ਗੁਰ ਸ਼ਬਦ ਲਖਾਰੀ ਬੇਲ ਦੀ ਨਾ ਨਾੜੇ ਬੇਲ ਬੁਲਾ ਨਾ ਨਾੜੇ ਜੇதோ ਸੇਵਕ ਭਾਈ ਜਿਹੜੇ ਸਤਸਰੂ ਜੇ ਜਿੱਤਾਰ ਮੰਨ ਦੋਏ ਹੋ ਜਾਂਦੇ ਨੇ ਸੇਵਕ ਹੋ ਜਾਂਦੇ ਨੇ ਸਾਹਿਨਾ ਦਾ ਬੁਲਾਪ ਜਦੋਂ ਕੋਈ ਸ਼ਬਦ ਗੁਰਉਪਦੇਸ਼ ਨਾਲ ਮਨ ਵਿੱਚ ਆ ਜਾਂਦਾ ਤਾਂ ਜਿੱਤਨ ਨੂੰ ਮਿਲਦਾ ਜਾ ਕੇ ਤਾਂ ਅਕਮਰਿਚੇ ਤੋਂ ਹੁੰਦਾ ਇਹ ਆ ਜਿੰਦੇ ਵੀ ਇੱਕ ਮਨ ਇੱਕ ਜਿੱਤਨ ਨੇ ਸਾਰੇ ਸੇਵਕ ਭਾਈ ਇਕੱਠੇ ਬੈਠੇ ਬੈਠ ਗੁਲਾਬ ਤਾਂ ਹੁੰਦਾ ਅਕਾਲੀਆਂ ਦਾ ਤਾਂ ਸਦ ਚਮਖੜਕਦੇ ਆਪਸ ਵਿੱਚੀ ਕੋਈ ਮਤਨ ਨਾਲ ਤਰਨ ਦਾ ਸਬੂਦੇ ਕੋਈ ਨਹੀਂ ਇੱਡਾ ਗੋਲਦ ਨੂੰ ਪੈਦੇ ਨੇ ਲੜਾਈ ਦਾ ਗੋਲਦ ਦੀ ਹੈ ਉੱਤੇ ਮੇਲ ਕੇ ਮੇਲ ਹੋ ਜੂਗਾ ਮੇਲ ਹੈ ਮਾਤਰਾ ਦਾ ਇਹਨਾਂ ਦਾ ਮਾਇਆ ਦਾ ਮਾਤਰਾ ਦਾ ਬਲੇ ਲੈ ਤੋ ਸਤਾਂ ਤਾਂ ਇਹ ਕਦੂਆਂ ਦੀਆਂ ਪੱਗਾਂ ਨਹੀਂ ਨੇ ਜੇ ਗੁਰਬਾਣੀ ਖਾਤਰ ਆਪ ਸਭ ਜੇ ਐ ਪੜਦੇ ਇਹਨਾਂ ਦਾ ਮੇਲ ਹੈ ਇਹ ਗੁਰ ਸ਼ਬਦ ਨਾਲ ਸਵਾਰੀ ਹੋਈ ਉਦੀ ਸਿਮਰੇ ਹੋਏ ਹੁੰਦੇ ਫਿਰ ਇਹਨਾਂ ਦਾ ਤੋ ਸੁਣ ਕਾਦੇ ਛੜਕਦਾ ਫਿਰ ਕਹਿੰਦਾ ਸਿੱਖਾਂ ਸੀ ਅਖਾਲੀਓ ਨਾ ਇਹ ਅਖਾਲੀ ਨੇ ਨਾ ਇਹ ਸਿੱਖ ਨੇ ਕੁਝ ਵੀ ਨਹੀਂ ਹੋ ਰਹੇ ਇਹ ਵਿਗੜਿਆ ਆ ਦੁੱਧਾ ਵਿਗੜਿਆ ਆ ਦੁੱਧਾ ਹੋਂਦ ਪਤਾ ਇਹ ਵਿਚਾਰੇ ਚੁੱਪ ਕਰ ਜਾਂਦੇ ਨੇ ਚੱਟ ਕੇ ਆਪਣੇ ਆਪ ਨੂੰ ਵੀ ਕਹੀ ਇਹਨਾਂ ਨੂੰ ਸੇਵਾ ਚੱਗੀ ਲੱਗਦੀ ਹੈ ਨਾ ਸੇਵਾ ਦੀ ਭੁੱਖ ਹੈ ਸੇਵਾ ਦੀ ਭੁੱਖ ਹੈ ਤੇ ਜਨ ਮਿਲਣ ਉਹ ਜਨ ਮਿਲਦੇ ਨੇ ਉਹ ਦਰਵਾਜ਼ੇ 'ਚ ਬੁੜਦੇ ਨੇ ਜਾ ਕੇ ਉਹ ਕਿੱਥੇ ਹੁੰਦੇ ਨੇ ਉਹ ਗੁਰੂ ਘਰ 'ਚ ਇਕੱਠੇ ਹੋ ਕੇ ਬੈਠਦੇ ਨੇ ਫਿਰ ਉਹਨਾਂ ਦੇ ਉਹ ਸ਼ਕਤ ਬਣਦੀ ਉਹਨੂੰ ਸਤ ਸੰਗਤ ਕਹਿੰਦੇ ਨੇ ਉਹ ਜੰਮ ਸ੍ਰੀ ਗੁਰੂ ਜੀ ਦੇ ਸਤ ਸੰਗਤ ਸਾਰਿਆਂ ਦੇ ਅੰਦਰ ਸੇਵਾ ਭਾਵ ਨੂੰ ਦੀ ਇੱਛਾ ਸੀ ਤੇ ਜਦ ਮਿਲਿਆ ਉਹ ਤੇ ਅੰਦਰੋਂ ਅੰਤਰਾ ਆਤਮਾ ਜੇ ਮਿਲੇ ਤੇ ਅੰਤਰਾ ਮਿਲੇ ਹੋਏ ਤੇ ਮਿਲਣ ਦਾ ਡਰੋਂ ਕਰਦੇ ਨੇ ਕੋਈ ਜਾਣਦਾ ਨਹੀਂ ਸੱਤਾਂ ਨੂੰ ਇਹ ਹੋ ਗਿਆ ਇਹਨਾਂ ਦਾ ਖੇਡ ਜਿਹੜਾ ਸੀ ਸਾਰਾ ਲੁੱਟਾ ਹੋ ਗਿਆ ਠੀਕ ਹੈ ਜੀ ਸੱਤ ਦਾ ਸੱਚ ਨਹੀਂ ਸੱਤ ਸਾਲ ਸਾਰੇ ਨੂੰ ਮਿਲਿਆ ਹੋਵੇ ਗੁਰ ਸ਼ਬਦ ਸਵਾਰੀ ਗੁਰ ਸ਼ਬਦ ਸਵਾਰੇ ਜਿਨ੍ਹਾਂ ਨੂੰ ਗੁਰ ਉਪਦੇਸ਼ ਨੇ ਸਵਾਰ ਦਿੱਤਾ ਉਹ ਮਿਲਦੇ ਨੇ ਇੱਕ ਤੋਂ ਨੇ ਬਾਲਾ ਦਾ ਅਸਰ ਜਿਨ੍ਹਾਂ ਤੇ ਨਹੀਂ ਹੋਇਆ ਉਹ ਬੋਲ ਨਹੀਂ ਸਕਦੇ ਆਪਸ ਵਿੱਚ ਚਾਹੇ ਉਹ ਨਿਆਣ ਸਿੱਖ ਵੀ ਹੋਣ ਇਹਨਾਂ 'ਚ ਵੀ ਗੋਲੀਆਂ ਕਾਹ ਚੱਲਦੀਆਂ ਨੇ ਇਹਨਾਂ 'ਚ ਵੀ ਕਬੂ ਇੱਥੇ ਹੀ ਤੂੰ ਸੱਚਾ ਸਾਹਿਬ ਅਲੱਖ ਹੈ ਗੁਰ ਸ਼ਬਦ ਲਖਾਰੀ ਇਹਦਾ ਸੱਚਾ ਸਾਹਿਬ ਅਲੱਖ ਹੈ ਅੱਖਾਂ ਨੂੰ ਦੇਖਣ ਵਾਲਾ ਨਹੀਂ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਕਹਿ ਸਕਦੇ ਤੁਸੀਂ ਸੱਚਾ ਸਾਹਿਬ ਅਲੱਖ ਹੈ ਉਹ ਤਾਂ ਫਿਰ ਤੂੰ ਸੱਚਾ ਸਾਹਿਬ ਅਲੱਖ ਹੈ ਗੁਰੂ ਗ੍ਰੰਥ ਸਾਹਿਬ ਤਾਂ ਫਿਰ ਕਿ ਜੇ ਤਾਣਾ ਤੂੰ ਸੱਚਾ ਸਾਇਬ ਅਲਖਨ ਨੇ ਜਦ ਵੀ ਹੁੰਦਾ ਹਿਰਦੇ ਜੁਲਦਾ ਹੈ ਹੁੰਦਾ ਹੈ ਨੇ ਗੁਰੂ ਰਣ ਸਾਹਿਬ ਚ ਕਿਤਾਬ ਖਲ ਵੀ ਤੂੰ ਸੱਚਾ ਸਾਇਬ ਅਲਖਨ ਗੁਰ ਸ਼ਬਦ ਲਿਖਾਰੇ ਆਏ ਲਖਾਏ ਨੇ ਗੁਰ ਸ਼ਬਦ ਉਹਦੇ ਅਜਿਹੇ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਹੋਏ ਜਿਹੜੇ ਸ਼ਬਦ ਇਹ ਲਖਵਾਉਣ ਵਾਲਾ ਤੂੰ ਠੀਕ ਹੈ ਜੀ ਉਹ ਲਗਾਵਾ ਵਾਲਾ ਤੂੰ ਮਰ ਪੁੱਛੇ ਤੈਨੂੰ ਇਹ ਜੜਾ ਕਿੱਡਾ ਬਰਭੂਸਾ ਪਾਇਆ ਜੜਾ ਤੇ ਤਾ ਕਿੱਪੋ ਬਣਾ ਕੇ ਰੱਖਦਾ ਹੈ ਨਾ ਠੋੜੀ